ਸਲੋਕ ਮਹੱਲਾ ਚੌਥਾ ਅੱਗੋਂ दे ਸਤਿ ਭਾਉ ਨਾ ਦਿੱਚੈ दे ਦੇ ਅੰਕ ਕੰਮ ਨਾ ਆਵੇ ਕਬਨਾ ਕਿੰਨਾ ਕਿਸਾਨੋ ਗਿਆਨ ਹੋ ਚੁੱਕਿਆ ਸੱਚ ਦਾ ਜਿੰਨਾ ਮਖਾਚਿਆ ਸੀ ਜਾਣ ਲਿਆ ਜੇ ਉਹਾਰੇ ਆਜ ਮੈਂ ਥੋੜਾ ਜਿਆ ਕਾਂ ਲੈ ਕੇ ਕਹਿੰਦੇ ਨੇ ਪਰ ਲੋੜ ਹੈ ਦੀ ਜੀ ਹੁਣ ਉੱਪਰ ਪਾ ਕੇ ਰੱਖ ਲੈਣਾ ਨੇ ਆਪ ਤੋਂ ਉੱਪਰ ਪਾ ਕੇ ਅੱਛਾ ਹੱਥ ਬੰਨ ਜਾਂਦੇ ਨੇ ਕੋਲੇ ਕਫੇ ਲੱਗ ਜਾਂਦੇ ਨੇ ਲੋਕ ਬੰਨਤਾ ਦੇਣ ਲੱਗ ਜਾਂਦੇ ਨੇ ਉਹ ਕਹਾਣੀ ਸੁਣਦੇ ਫਿਰ ਉਹਨਾਂ ਦਾ ਉੱਤੇ ਇੱਕ ਹੋ ਜਾਂਦਾ ਫਿਰ ਪਰ ਜਿਹਨੂੰ ਸੱਚੇ ਰੋ ਭੁੱਖ ਲੱਗੀ ਰਹੇ ਇਹਦਾ ਟਾਰਗੇਟ ਤੇ ਪਹੁੰਚਣਾ ਚਾਹੀਏ ਜੋ ਟਾਰਗੇਟ ਹੈ ਜੋ ਸੁਣਿਆ ਹੋਇਆ ਹੈ ਇਹਦੇ ਵਿੱਚ ਪਹਿਲਾਂ ਜਿਉਂਦਾ ਮੁਕਤ ਅਵਸਥਾ ਜਿਉਂਦਾ ਵਰਜਾਈਦਾ ਹੈ ਮਰ ਕੇ ਫਿਰ ਜਿਉਂਦਾ ਹੋ ਜਾਂਦਾ ਹੈ ਇਹ ਅਵਸਥਾ ਤਾਂ ਬਿਲਕੁਲ ਪ੍ਰਾਪਤ ਨਹੀਂ ਹੋਈ ਮੈਂ ਤਾਂ ਉੱਥੇ ਪਹੁੰਚਣਾ ਜਿਉਂਦਾ ਬਣਦਾ ਹੈ ਮਰ ਫਿਰ ਜਿਉਂਦਾ ਹੋਣਾ ਦੇਖਣਾ ਕੀ ਤਮਾਸ਼ਾ ਜਿਹਦਾ ਤਾਂ ਇੱਥੇ ਟਾਰਗੇਟ ਬਣਾ ਕੇ ਰੱਖੇ ਉਹਦਾ ਤਾਂ ਗੋਲ ਨਾ ਭਾਉ ਬਣਿਆ ਰਹਦਾ ਗੋਦੀ ਭੁੱਖ ਬੜੀ ਰਹਦੀ ਹੈ ਜੱਣ ਜੀ ਜਿਹੜਾ ਇਹਦਾ ਤੇ ਵਿਸ਼ਵਾਸ ਫੇਰ ਨਾ ਕਰੇ ਤਾਂ ਹੋਈ ਸਕਦਾ ਥੋੜਾ ਬਹੁਤਾ ਧਿਆਨ ਲਿਆ ਅਸਲੇ ਚਾਰ ਨੇ ਲਾ ਲੇ ਆਪਣਾ ਬੈਠੇ ਨੂੰ ਥੋੜੇ ਕੁਫੇ ਬਰਦਨੇ ਬੋਲਤਾ ਹੁੰਦੀ ਹੈ ਹਾਂ ਲੋਗ ਲੱਗੇ ਨੇ ਇਹ ਦਾ ਜਿਹੜਾ ਗਿਆਨ ਆ ਨਾ ਛੱਤ ਦਾ ਭੌ ਭੁੱਖ ਜਿਦਈਰ ਬੰਦੀ ਹੈ ਜਿਦਈ ਲੱਗੀ ਹੋਈ ਭੁੱਖ ਉਹਦੇ ਅੰਦਰ ਜਾਗੀ ਹੋਈ ਪਿੱਛੋਂ ਨਾ ਗਿਆ ਕਦ ਆਖਿਆ ਕਦ ਨਾ ਔਰ ਜਿਹੜੀ ਕਹਾਣੀਆਂ ਸੁਣੀ ਹੋਈਆਂ ਉਹੀ ਬਾਰ ਬਾਰ ਸੁਣਾਈ ਜਾਂਦਾ ਉਹੀ ਬਾਰ ਬਾਰ ਸੁਣਾਈ ਜਾਂਦਾ ਉਹੀ ਬਾਰ ਬਾਰ ਸੁਣਾਈ ਜਾਂਦਾ ਜੇ ਮਰਵਾਣ ਦੀ ਲੋਕ ਕਥਾ ਕਰਦੇ ਨੇ ਥਾਕੀਆਂ ਖਵਾਉਂਦੇ ਨੇ ਸੰਤ ਇਹ ਪਿਛੋਂ ਦਾ ਕਿਹਾ ਹੈ ਕਹਾਂ ਕਿਹਾ ਹੈ ਲੋਕਾਂ ਨੇ ਐਟਿਆ ਕਹਤੀ ਗੱਲਾਂ ਜਿਹੜੀਆਂ ਕਹੀ ਜਾਂਦੇ ਨੇ ਉਹਨਾਂ ਚੋ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ ਤਾਂ ਹੀ ਲੋਕ ਸਾਡੇ ਸਾਡੇ ਦੇਣੇ ਚਾਲ ਤੇ ਦੂਦਾਰੇ ਹਟ ਗਏ ਕਿਉਂ ਲੋਭ ਧਰਫ ਤੋਂ ਪਿਛੇ ਹਟ ਗਏ ਉਹੀ ਜ਼ਾਕੀਆਂ ਸੁਣਾਈ ਜਾਂਦੇ ਉਹੀ ਜ਼ਾਕੀਆਂ ਪਿੱਛੋਂ ਦਾ ਕਿਹਾ ਹੋਇਆ ਉਹ ਪਹਿਲਾਂ ਕਿਹਾ ਹੋਇਆ ਤੁਸੀਂ ਉਹਦੇ ਸਾਖੀ ਉਹੀ ਬੇਸਣਾ ਕਰਦੇ ਉਹ ਬੇਰੇ ਰੱਬ ਦੀ ਦਾ ਕਿਹਾ ਹੋਇਆ ਪਹਿਲਾਂ ਕਿਸੇ ਦਾ ਕਿਹਾ ਹੋਇਆ ਪਹਿਲਾਂ ਉਹਨੇ ਕਿਹਾ ਤਾਂ ਹਾਂ ਆਪਣਾ ਅਸਤੇ ਉੱਪਰ ਗੱਲਾਂ ਕਰਤੇ ਅੱ깔ੂ ਕੰਪਲ ਆਦਿ ਮੈਂ ਰਾਗ ਦਾ ਦਿਖਾਓ ਹੁਣ ਤਾਂ ਦੱਸੋ ਕਿ ਤੈਨਾਂ ਲੱਗੇ ਹੋਏ ਇਹ ਸਭ ਝੂਠ ਬੋਲੇ ਹੋਏ ਨੇ ਇਹ ਪਿੱਛੋਂ ਦਾ ਗਿਆ ਜਿਹੜੀ ਉਹ ਵਾਰੀ ਸਾਡੀ ਸੁਣਾਈ ਜਾ ਇਹਦੇ ਨਾਲ ਤੁਹਾਡਾ ਗਿਆਨ ਕੋਈ ਨਹੀਂ ਬਦਲਣਾ ਸੁਣਨ ਵਾਲੇ ਤਾਂ ਸੁਣ ਲੂਗਾ ਇੱਕ ਵਾਰ ਚਲੋ ਇੱਕ ਵਾਰ ਸੁਣ ਲਿਆ ਦੋ ਵਾਰ ਸੁਣ ਲਿਆ ਚਾਰ ਵਾਰ ਸੁਣ ਲਿਆ ਪਰ ਬਾਤ ਰਿਹਾ ਕਿ ਕਬਨੇ ਵਾਲੀ ਚੀਜ਼ ਹੈ ਇਹ ਜੀਜਾ ਕਬੂਲ ਵਾਲੀ ਨਹੀਂ ਆਨ ਸਾਖੀਓ ਜਿਹੜੀਆਂ ਸੁਣੇ ਜਾਂਦੇ ਹੋ ਨਹੀਂ ਅੱਜ ਤੇ ਕਿਹੜੇ ਬੋਹ ਭਾਸਾ ਲੋਕ ਵਿਖੀ ਤੋਂ ਵੀ ਛੱਡ ਗਏ ਗੱਲ ਕਿਉਂ ਸੁਖ ਪਾਵੇ ਆਦਮੇ ਜੇ ਵਰਤਾ ਧਾਉ ਧਰਮ ਕਰਿਆ ਧਾਉ ਧਰਮੀ ਨੇ ਦੇਖਣ ਨੂੰ ਲੋਕਾਂ ਦੇ ਵਾਸਤੇ ਧਰਮਕ ਫਟੋ ਗੁਣੀਆ ਉਹ ਸਤੋਖੀ ਵੀ ਹੈ ਕਿਤਾ ਆਦਮੀ ਵੀ ਹੈ ਤੇ ਵੀ ਹੈ ਪੈਸੇ ਵੀ ਨਹੀਂ ਦੱਸਦਾ ਪਰ ਸੱਚ ਦੀ ਜਾਣਕਾਰੀ ਬਣੀ ਟਾਰਗੇਟ ਵੀ ਗਵਾ ਬੈਠਿਆ ਅੰਨੇ ਵੀ ਨਹੀਂ ਵਗ ਰਹੇ ਅੱਧ ਵਿਚਾਲੇ ਬੈਠ ਗਿਆ ਅੱਧ ਵਕਈ ਅੱਧ ਵਿੱਚ ਤੇ ਟੁੱਟ ਗਿਆ ਗੱਲਾਂ ਹੀ ਕਰਦਾ ਹੈ ਗੱਲ ਹੀ ਕਿਤੇ ਨਾ ਪਾਇਆ ਇੱਕ ਫੇਰੇ ਧਲੇਰੇ ਕਰੇ ਗਲ ਨੂੰ ਗੱਲ ਹੀ ਜੀੜੂ ਪਾਇਆ ਗੱਲ ਨੂੰ ਕਰਦਾ ਸਾਖੀ ਜੀ ਸੁਣਾਉਂਦਾ ਉਹ ਉੱਚੇ ਤੇ ਉੱਚਾ ਭਗਵਾਨ ਰੋਜ਼ ਦਿਨ ਤਨ ਨੂੰ ਦਾ ਰੀਤ ਨੂੰ ਗਿਆ ਨਹੀਂ ਆ ਰਹੇ ਹੱਥੋਂ ਪ੍ਰਗਟ ਹੋ ਰਿਹਾ ਅੰਧ ਵਿੱਚ ਫੇਰੇ ਮਨ ਮੁਖ ਵਿਚਾਰਾ ਮਨ ਮੁਖਾਂ ਦੇ ਚ ਫਿਰਦਾ ਗੱਲ ਨਹੀਂ ਸੁਖ ਪਾਵ ਸੁਖ ਹੈ ਜੀ ਦੱਲ ਨਾਲ ਸੁਖ ਦੀ ਮਰਿਆ ਕੇ ਜੀ। ਨੌ ਦਾ ਨੌ ਦਾ ਦੁੱਖ ਸਤੇ ਖੜਾ ਹੈ। ਨਬਲ ਬਲ ਸਤੇ ਖੜਾ। ਆਹ ਹੈ ਜੀ, ਆਹ ਹੈ ਜੀ, ਆਹ ਹੋ ਗਿਆ ਆਦਮੀ ਬਣ ਜਾਇਆ। ਠੀਕ ਹੈ ਜਿਸ ਅੰਦਰ ਪ੍ਰੀਤ ਨਹੀਂ ਸਤਗੁਰ ਆਵੇ, ਕੂੜੀ ਜਾਵੇ। ਜਿਹਦੇ ਅੰਦਰ ਸਤਗੁਰ ਦੀ ਪ੍ਰੀਤ ਨਹੀਂ ਹੈ, ਜਿਹਦੇ ਸਤਪੁਰਖ ਜਨਮ ਦੀ ਇੱਛਾ ਨਹੀਂ ਜੀਦੇ ਅੰਦਰ। ਸਤ ਮੁਕਤ ਨੂੰ ਜਨਨ ਦੀ ਇੱਛਾ ਜੀਦੇ ਅੰਦਰ ਹੈ ਨਹੀਂ। ਉਹਨੇ ਸਤਗੁਰ ਨਾਲ ਪ੍ਰੀਤ ਰਹੀ ਹੈ। ਉਹ ਕਹੇ ਸਤਗੁਰ ਸਤਪੁਰਖ ਜਨਨ ਆਪਣਾ ਮੂਰ ਹੈ। ਸਤਗੁਰ ਤੇ ਖਾਲੀ ਕੋਈ ਨਹੀਂ। ਸਤਗੁਰ ਸਭ ਦੇ ਅੰਦਰ ਹੈ। ਸਤਗੁਰ ਨੂੰ ਸਤਗੁਰ ਦੇ ਬਲਾਪ ਦੇ ਜੀ ਅੰਦਰ ਪ੍ਰੀਤ ਰਹੀ ਹੋਈ ਨਹੀਂ। ਠੀਕ ਹੈ ਕੋੜੀ ਆਵਾ ਕੁਪੀ ਜਾਵੇ ਉਹ ਆਤਮਾ ਕੋੜੀ ਹੁੰਦੀ ਹੈ ਕੁੜੀ ਉਹ ਮਰ ਜਾਂਦੀ ਹੈ ਝੂਠ ਨਾਲ ਜੁੜ ਕੇ ਆਉਂਦੀ ਹੈ ਸਰੀਰ ਝੂਠ ਹੈ ਮਾਇਆ ਨਾਲ ਜੁੜ ਕੇ ਆਉਂਦੀ ਹੈ ਮਾਇਆ ਦਾ ਲੈ ਕੇ ਮਰ ਜਾਂਦੀ ਹੈ ਮਾਇਆ ਨਾਲ ਜੁੜੀ ਮਰ ਜਾਂਦੀ ਹੈ ਮਾਇਆ ਨੂੰ ਪਿਆਰ ਨਹੀਂ ਸਕਦੀ ਸਾਰੀ ਜ਼ਿੰਦਗੀ ਮਾਇਆ ਨਾਲ ਜੁੜ ਕੇ ਆਉਂਦੀ ਹੈ ਤਾਂ ਮਾਇਆ ਨੂੰ ਛੁੱਟ ਕੇ ਹੀ ਮਰ ਜਾਂਦੀ ਹੈ ਕੋੜੀ ਆਵਾ ਉੜੀ ਜਾਵੇ ਸੱਚ ਦਾ ਗਿਆਨ ਉਹਨੂੰ ਹੁੰਦਾ ਹੀ ਨਹੀਂ ਆਤਮ ਦਰਪੀ ਹੁੰਦਾ ਹੀ ਨਹੀਂ ساری ਜ਼ਿੰਦਗੀ ਤਾਂ ਆਤਮ ਦਰਖਾਉਂਦਾ ਹੈ ਨਾ ਆਪਣੇ ਬੂਲ ਦਾ ਕਰਤਾ ਤਾਂ ਪਾਰ ਬ੍ਰਹਮ ਨਜ਼ਰੀ ਆਵੇ ਜੇ ਮੇਰਾ ਹਰ ਪ੍ਰਭ ਕਿਰਪਾ ਉਰੂ ਸਾਕੇ ਨਾਲ ਦੀ ਭੁੱਖ ਲੱਗੀ ਰਹੇ ਸਾਕੇ ਨਾਲ ਦੀ ਭੁੱਖ ਲੱਗੀ ਰਹੇ ਜਿਵੇਂ ਕਬੀਰ ਨੂੰ ਲੱਗੀ ਗਈ ਫਿਰ ਇਹ ਲੋਕ ਹੈ ਕਿ ਉਹ ਕਹਿੰਦੇ ਯੋ ਅਵਸਥਾ ਆਪ ਚਾਈ ਦੀ ਹੈ ਤੁਸੀਂ ਮੇਰੇ ਅਵਸਥਾ ਕਹਿੰਦੇ ਸੀ ਜੀਨ ਮੁਕਤ ਮੇਰਾ ਮੁੰਡਿਆ ਕਿਉਂ ਨਾਮ ਹੋਇਓ ਮੇਰਾ ਬੁੱਢ ਮੋਰੀਆ ਕਬੀਰ ਮੈਂ ਜੋ ਕੁਝ ਤੁਸੀਂ ਕਹਾ ਕੀਤਾ ਉਹਦਾ ਨਹੀਂ ਕੀਤਾ ਦੱਸੋ ਮੈਨੂੰ ਉਹ ਅਵਸਥਾ ਤੁਹਾਨੂੰ ਪ੍ਰਾਪਤ ਹੋਈ ਉਹ ਤੇਰਾ ਉਟਾਲੇ ਦਾਸ ਤੇ ਜਿੱਦ ਸਿੱਧ ਬੋਲੀ ਉਹ ਕਹਿੰਦਾ ਮੈਨੂੰ ਕੁਛ ਨਹੀਂ ਚਾਹੀਦਾ ਇਹ ਤਾਂ ਭੁੱਖ ਹੈ ਤੇ ਸਿੱਧ ਭੁੱਖ ਹੈ ਸਾਰੇ ਪਦਾਰਥਾਂ ਦੀ ਭੁੱਖ ਹੈ ਭੁੱਖੇ ਭਰਤਣ ਚੀਜ਼ੇ ਭੁੱਖੇ ਤਾਂ ਫੜੋ ਆਪਣੀ ਵਾਲਾ ਇਹ ਵਾਲਾ ਤੁਸੀਂ ਝੂਠੇ ਹੋ ਤੁਸੀਂ ਉਹ ਅਵਸਥਾ ਪ੍ਰਾਪਤ ਕਰਾਇ ਨਹੀਂ ਸਕਦੇ ਉਰ ਮੈਂ ਹੋਰ ਘਰ ਦੇਖੂਗਾ ਕੋਈ ਫਿਰ ਮੱਗਰ ਗਿਆ ਮੱਗਰ ਗਿਆ ਉਸ ਪ੍ਰਾਪਤ ਹੋ ਗਿਆ ਇਸ ਕਰਕੇ ਜਿੱਦੇ ਤੇ ਛਿਰਕਾ ਹੋ ਜਵੇ ਤੇ ਕਿਰਪਾ ਹੋਈ ਫੜਤੀ ਉਹ ਪਤਾ ਲੱਗ ਗਿਆ ਵੀ ਇਹਦਾ ਝੂਠ ਹੈ ਝੂਠ ਛੱਡ ਕੇ ਤੇ ਕਿਰਪਾ ਹੋਈ ਮੂਰਤੀ ਪੂਜਾ ਕਰਦਾ ਸੀ ਸ੍ਰੀਨਾਥ ਮਿਲ ਗਿਆ ਕਿਰਪਾ ਹੋਈ ਦਰਖਲ ਕਰਾਤਾ ਦੇਵੀ ਦਾ ਉੱਥੇ ਦੇਵੀ ਦਾ ਚੇਤਨ ਹੁੰਦੀ ਆ ਤੇਰੇ ਅੰਦਰ ਹੀ ਆ ਉਹ ਬਿਵੇਕ ਬੁੱਧੀ ਦੇਵੀ ਆ ਉਹ ਵੇਖ ਬੁੱਢੀ ਗੁਰਨਾਣ ਕੋ ਸਹੀ ਅਨੇ ਹੋਈ ਸੀ ਅਨੇ ਹੋਈ ਸੀ ਇੱਕੋ ਹੀ ਸ਼ਬਦ ਬੋਲ ਨਾਲ ਵੇਦੇ ਗਏ ਗੁਰੂ ਗਏ ਕਰਕੇ ਜਿੱਦ ਤੱਕ ਹੋ ਜਾਵੇ ਉਰ ਉਪਰ ਨਹੀਂ ਹੁੰਦਾ ਉਹ ਉਹ ਦਹਾ ਗਿਆ ਉਹ ਆਤਮ ਸੱਤੀ ਹੁੰਦਾ ਜਾਂ ਕਿਤੇ ਇਹਨਾਂ ਦਾ ਪਾਪ ਇਹਨਾ ਸਤਗੁਰੂ ਦਾ ਦਰਸ਼ਨ ਹੋਊ ਫਿਰ ਸਤਗੁਰੂ ਨੂੰ ਪਾਰ ਬ੍ਰੰਧ ਦਾ ਦਰਸ਼ਨ ਹੋਊ ਹੈ ਜੀ ਸਤਗੁਰੂ ਦਾ ਦਰਸ਼ਨ ਸਤਗੁਰੂ ਨੂੰ ਹੀ ਪਾਰ ਆ ਸਤਗੁਰਾਂ ਦੇ ਜਿਹੜਾ ਦਰਸ਼ਨ ਕਰਨਾ ਨੂੰ ਪਾਰ ਬ੍ਰੰਧ ਬ੍ਰਹਮ ਤੋਂ ਵੀ ਅੱਗੇ ਹੈ ਸਾਰ ਬ੍ਰਹਮਾ ਬ੍ਰਹਮ ਤੋਂ ਅੱਗੇ ਦੇਖੋ ਆਰਖ ਨੂੰ ਬੇਸ਼ਰੂਪ ਹੈ ਸਤਗੁਰ ਬੀਜ ਰੂਪ ਹੈ ਬੀਜ ਨੂੰ ਫਲ ਲੱਗਦੇ ਨੇ ਲੱਗਦਾ ਸਰ ਇਹ ਕੋਈ ਤਾਂ ਉਗਵਾ ਨਾਚੂਰ ਦੇ ਵਿੱਚ ਸਤਗੁਰ ਦੇ ਰੂਪ ਤੇ ਤੈ ਸਾਹ ਚ ਹੈ ਫਿਰ ਉਗਦਾ ਜਾਵੇ ਇਹਦੇ ਵਿੱਚੋਂ ਫਿਰ ਫਲ ਲੱਗਦਾ ਠੀਕ ਹੈ ਜੀ ਕਾ ਅਪਿਓ ਪੀਵੇ ਸ਼ਬਦ ਗੁਰਕੇਰਾ ਸਭ ਕਾਲਾ ਦੇਸਾ ਭਰਮ ਚੁਕਾਵੇ ਫੇਰ ਅਪਿਓ ਪੀਵੇ ਇਸ ਦਾ ਸਰੀਰ ਕਰਕੇ ਪਿੰਦਾ ਇੱਕ ਆਤਮਾ ਕਰਕੇ ਪਿੰਦਾ ਅਪਿਓ ਐ ਅਪਿਓ ਗਿਆ ਤੇ ਜਿਹੜਾ ਅਜਬਾ ਜਾਪ ਕੇ ਹੈ ਅੱਛਾ ਕੀਪਤਾ ਹੈ ਪਰ ਜਪਿਆ ਨਹੀਂ ਇਹ ਆਰੂਣੀ ਤੇ ਬੋਲ ਸੁਣ ਕੇ ਆ ਗ੍ਰੰਥ ਪੜ੍ਹ ਕੇ ਵੀ ਆਈ ਜਪਾਂ ਆਪਾਂਦਰੋਂ ਸਮਝ ਆਈ ਆ ਪੰਜਾਬ ਜਿਹੜੀ ਅੰਦਰੋਂ ਸਮਝ ਨਾ ਹੁੰਦੀ ਇਹ ਉਹ ਜਪਾ ਜਪਾ ਜਪਿਆ ਸਮਝ ਆਈ ਜਾਂਦੀ ਹੈ ਕਾਹਦੇ ਗਾਹੂੰ ਸਿੱਧ ਜਪ ਕੇ ਪੜ੍ਹ ਕੇ ਗੁਰਬਾਣੀ ਨੂੰ ਸਮਝ ਕੇ ਵਿਚਾਰ ਕੇ ਸਮਝ ਆਉਂਦੀ ਹੈ ਉਹ ਜਪਾ ਹੈ ਅਜਿਹਾ ਬਾਜਾ ਵੀ ਤੋਂ ਘਾਹ ਦੀ ਆਪੇ ਹੀ ਅੰਦਰੋਂ ਸਮਝ ਆਉਣ ਲੱਗਦੀ ਹੈ ਜਿਵੇਂ ਪਹਿਲਾਂ ਨਾਲ ਪਾਣੀ ਪਾਉਦੇ ਹੋ ਮਿੱਟੀ ਹੁੰਦੀ ਹੈ ਉਹ ਹਾਲੇ ਹਾਲੇ ਹਾਲੇ ਹਾਲੇ ਬੋਰ ਕਰੀ ਜਾਂਦੇ ਹੋ ਮਿੱਟੀ ਬਾਹਰ ਕੱਢੀ ਜਾਂਦੇ ਫਿਰ ਉਹ ਇੱਕ ਪਤਨ ਦੇ ਬੋਹੜ ਨਾਲ ਕੇ ਪਾਣੀ ਆ ਜਾਂਦਾ ਫਿਰ ਪਾਣੀ ਹੁੱਸੇ ਦੇ ਵਿੱਚੋਂ ਆਪੇ ਹੀ ਨਿਕਲੀ ਜਾਂਦਾ ਜਾਂ ਨਾ ਹੈ ਕਿਉਂ ਗੱਲ ਫਿਰ ਪਾਣੀ ਆਪੇ ਹੀ ਥੱਲੇ ਆਉਂਦਾ ਨਿਕਲੀ ਜਾਂਦਾ ਉਹ ਜਿਹੜਾ ਥੱਲੇੋਂ ਆ ਕੇ ਗਲਦਾ ਉਹ ਵਿਚੋਂ ਆ ਕੇ ਗਲਦਾ ਉਹ ਅਜਿਹਾ ਜਪ ਹੈ ਜਿਹੜਾ ਉੱਤੋਂ ਆਇਆ ਸੀ ਗਉਣੀ ਉਹ ਜਪ ਹੈ ਉਹ ਜਪ ਸੀਗਾ ਉਹ ਜਪ ਛਾਬ ਸੀ ਜਿਹੜਾ ਥੱਲੇੋਂ ਆ ਕੇ ਜਪਾ ਜਪਾ ਤਾਪਿਓ ਪੀਵੇ ਸ਼ਬਦ ਗੁਰਕੇਰਾ ਸਭ ਕਾਲਾਂ ਦੇਸਾ ਪਰਮ ਚੁਕਾਵੇ ਸਤਗੁਰ ਕੇਰਾ ਸਤਗੁਰ ਦੀ ਬਾਣੀ ਇਸ ਅੰਦਰੋਂ ਯਾਤਰਾ ਆਤਮਾ ਦੇ ਵਿੱਚ ਆਉਂਦੀ ਹੈ ਜਿਹੜੀ ਆਵਾਜ਼ ਉਹ ਪਿੱਤਦਾ ਫਿਰ ਉਹ ਲੈਂਦਾ ਫੇਰ ਧਰਮ ਦਾ ਨਾਸ ਠੀਕ ਜ਼ਰੂਰ ਹੈ ਨਾਸ ਨਹੀਂ ਹੁੰਦਾ ਗੁਰਪ੍ਰਸਾਦ ਧਰਮ ਦਾ ਨਾਸ ਇਹ ਜਿਹੜਾ ਗੁਰਪ੍ਰਸਾਦ ਮਿਲਦਾ ਨਾ ਅੰਦਰੋਂ ਇਹਦੇ ਨਾਲ ਧਰਮ ਦਾ ਨਾਸ ਹੁੰਦਾ ਫੇਰ ਪਤਾ ਲੱਗਦਾ ਵੀ ਦੁਆਨਾਂ ਨੇ ਗਲਤੀ ਇਹਨਾਂ ਔਰ ਆਪ ਜੰਦੋਲਿਆਂ ਜਿਹੜੀਆਂ ਸਰਦਬੋਮਾਂ ਬਣਾਈਆਂ ਸੀ ਉਹਦਾ ਤਾਂ ਕਾਰਨ ਇਹ ਸੀ ਉਹ ਤਾਂ ਕਿੰਨੇ ਨੇ ਇੱਕ ਦੁਰਮਤ ਹੈ ਇੱਕ ਮਨਮਤ ਹੈ ਤੇ ਇੱਕ ਗੁਰਮਤ ਹੈ ਤਿੰਨੇ ਦੇ ਬੋਲੋ ਜੀ ਗੁਰਮਤ ਨੂੰ ਤਾਂ ਜਿਆ ਹੈ ਗੁਰਮਤ ਵੱਲ ਲਾਲੋ ਜੈ ਦੁਰਮਤ ਵੱਲ ਲਾਲੋ ਤਾਂ ਵਿਚਾਰੀ ਸਾਜੀ ਗੁਰਮਤ ਲੈ ਕੇ ਜਾਂਦਾ ਹੈ ਬੁਰੇ ਪਾਸੇ ਸਾਖ ਤੇ ੱਟੇ ਚੜ ਗਈ ਦੁਰਮਤ ਬਣ ਗਈ ਸੰਤ ਜੀ ਨਾਲ ਲਾਗੀ ਘਰੋਂ ਆਤ ਬਹਾਈ ਈਕੇ ਜੀ ਸਦਾ ਰਹੇ ਦਿਨ ਰਾਤੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੈ ਸਦਾ ਅਨੁਧ ਰਹਿ ਜਨ ਰਾਤੀ ਫਿਰ ਅਨੰਦ ਸਦਾ ਅਨੁਧ ਪਰਮ ਅਨੰਦ ਦੀ ਅਵਸਥਾ ਫੇਰੋ ਅਨੰਦ ਦੀ ਅਵਸਥਾ ਸਦਾ ਅਨੁਧ ਰਹਿ ਜਨ ਰਾਤੀ ਫਿਰ ਸਾਰਾ ਉਹ ਪਰਮ ਅਨੰਦ ਫੇਰ ਦੰਗਾ ਕਿਤੇ ਐ ਮੈਨੇ ਜਰਨ ਦੀ ਤੁਹਾਨੂੰ ਤੁਹਾਨੂੰ ਸਭ ਕੋ ਕਹਿਣੇ ਉਹਨੂੰ ਗੁਰਤੇ ਜਾਣੇ। ਤੈਨ ਨਾਨਕ ਅੰਦਿਨ ਹਰ ਗੁਣ ਗਾਵੇ। ਜੰਮ ਵਾਲਾ ਜਦੋਂ ਆਲਨ ਦੇ ਰੱਖਣ ਉਹਨੇ ਬੇਲਾ ਕੁਰਬਾਨੀਆਂ ਚਾਲਨ ਕਰਦਾ ਫਿਰ ਹੋਰ ਕੋਈ ਕੰਮ ਰਹੇ ਨਹੀਂ ਹੋਰ ਕੋਈ ਗੱਲ ਕਰਦਾ ਹੋਰ ਗੱਲ ਕੋਈ ਚੰਗੀ ਲੱਗਦੀ ਹੋਈ ਨਹੀਂ। ਨਾ ਹੋਰ ਕੋਈ ਗੱਲ ਸੁਣਦਾ ਨਾ ਹੋਰ ਕੋਈ ਗੱਲ ਕਰਦਾ ਹੈ। ਇਹ ਸਰਬਣਾ ਮੇਰਿਓ ਨੂੰ ਪਠਾਏ। ਜੈ ਰੋਣਾ ਨੂੰ ਪਠਾਏ ਸਰੀਰ ਲੈ ਸੁਣੋ ਸਤ ਬਾਣੀ ਜਿਤ ਸੋਨੇ ਤਨ ਬਲ ਵੜਿਆ ਹੋਆ ਰਸਨਾ ਸਤ ਬਾਣੀ ਕੀ ਗੈ ਸਾਚੇ ਆਲਕ ਬਿਚਾਲੀ ਸਾਧੀ ਰਖ ਕੇ ਹੀ ਨ ਜਾਏ ਕਹਿ ਨਾਮ ਸਭੇ ਇਤਰਾਮ ਸੁਣ ਕੋਬਿਤਰ ਹੋਬੋ ਸਾਚੇ ਸੋੜ ਨੂੰ ਪਠਾਏ ਬਾਦ ਸਾਚੇ ਬਿਰਨ ਦੀ ਕੁਸਤ ਨੂੰ ਸੁਣਦਾ ਹੀ ਨਹੀਂ ਸਾਚੇ ਬਿਰਨ ਕੁਛ ਬੋਲਦਾ ਹੀ ਨਹੀਂ ਆਕਾਸ਼ ਤੇ ਬਿਨਾਂ ਕੁਝ ਬੋਲ ਸਕਦਾ ਬੋਲਣਾ ਹੀ ਨਹੀਂ ਲੱਗਦਾ। ਸਾਚ ਤੇ ਬਿਨਾਂ ਸੁਣਨਾ ਔਰ ਬੋਲਣਾ ਕਿੱਦਾਂ ਨਹੀਂ ਲੱਗਦਾ ਕੁਝ। ਜੀ। ਕਿਹੋ ਅਵਸਥਾ ਹੈ। ਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉਠ ਹਰਨਾਮ ਧਿਆਵੇ ਪ੍ਰਭਾਤੀ ਜਿਸ্নান ਕਰੇ ਅੰਮ੍ਰਿਤ ਸਰਨਾਵੇ। ਹਾਂ ਇਹ ਦੋ ਤਰੀਕੇ ਆ ਗਏ ਉੱਪਰਲੇ ਤਰੀਕੇ ਦੇ ਵਿੱਚ ਜਿਹੜਾ ਬੰਦਾ ਸੀ ਉਹ ਅਸਲ ਦੇ ਵਿੱਚ ਉਹ ਜਦ ਕਬੀਰ ਕਹਿੰਦਾ ਨਾ ਚੱਲੇ ਤੇ ਹਰ ਮਨੁੱਖ ਕੋਈ ਵੀ ਚੇ ਬਹੁਤ ਕੀ ਹੈ ਕੈਸੋ ਕੀਓ ਨਾ ਮੈਂ ਬਣਾਇਆ ਸਤਗੁਰੂ ਦੀ ਮਿੱਤਾ ਤਾਂ ਛਲਤੀ ਤਿਆਗਤੀ ਕਰਨ ਦਾ ਨੂੰ ਮਿਲ ਚੱਲਿਆ ਤਾਂ ਚੇਲੇ ਲੈ ਐਨੇ ਬਣ ਗਏ ਛੇਲਿਆਂ ਦੀ ਭੀੜ ਚ ਭੁੱਲ ਗਿਆ ਉਹ ਕਿਆਗਤਾ ਅਗਲਾ ਸਫਰ ਤੇ ਕੋ ਬੀਚੇ ੜ ਕੇ ਜੀਤ ਉਹ ਪਹਿਲੀ ਅਵਸਥਾ ਜਿਹੜੀ ਦਸੀ ਹੈ ਉਹ ਆਦਮੀ ਹੈ ਗੁੱਲ ਪਰ ਗੁੱਲ ਬਦਲ ਵੀ ਸਕਦਾ ਇਹ ਵੀ ਦੰਦਾ ਗੱਲ ਦੱਸਤੀ ਮਨੋਭੋਤ ਹੈ ਖਲ ਇਹ ਛਤੋਗੁਣ ਅਵਸਥਾ ਹੈ ਛਤੋਗੁਣ ਅਵਸਥਾ ਅਜੇ ਨਾਲ ਹੈ ਅੰਦਰ ਆਦਮੀ ਠੀਕ ਹੈ ਛਤੋਗੁਣ ਦੀ ਅਵਸਥਾ ਇਹ ਤਿੰਨ ਗਾਇਆਂ ਨੇ ਸਦੋਗੁੜ ਦੀ ਖਾਈ ਦੇ ਵਿੱਚੋਂ ਐਸਾ ਠਿਗਿਆ ਬਾਹਰ ਦੇ ਵਿੱਚ ਪਰਪਲਚ ਰਹਿ ਗਿਆ ਜਾਂਦਾ ਪਰਪੰਚ ਬਹੁਤਾ ਬਹੁਤ ਹੋ ਜਾਂਦੀ ਹੈ ਪੀੜ ਬਹੁਤ ਵਾਲਾ ਇਕੱਠੀ ਹੋ ਜਾਂਦੀ ਹੈ ਲੋਕ ਆ ਕੇ ਕਰਨ ਲੱਗ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੀ ਸਵਾਗਤ ਦੇਣ ਲੱਗ ਜਾਂਦੇ ਨੇ ਆਪਾਂ ਇਹਦੇ ਕੁੜੀਆਂ ਦਾ ਵਿਆਹ ਕਰੀਏ ਯੋਗ ਕਰੀਏ ਯੋਗ ਕਰੀਏ ਉੱਬਈ ਨਦੀ ਸਾਫ ਕਰੀਏ ਜੀ ਪਰ ਸਰਪਤਾ ਦੇ ਕਦੋਂ ਗੱਲ ਨਹੀਂ ਚਾਹੀਦੀ ਲੋਕ ਦੀ ਫਿਰ ਤਾਂ ਪਟਿਆ ਗਿਆ ਉਹ ਨੂੰ ਗੁਰੂ ਬਣਾ ਲਿਆ ਪਟਿਆ ਗਿਆ ਉਹ ਗਿਆ ਸੁਣ ਲਾ ਗਿਆ ਲੋਕ ਫਿਰ ਤਾਂ ਗਿਆ ਫੇਰ ਉਹ ਪਰਪੰਚ ਤੇ ਰਹਿ ਜਾਊਗਾ ਪਰਪੰਚ ਤੇ ਲੋਕ ਕਹਿੰਦੇ ਨੇ ਉਹ ਦੇ ਤੇ ਦੱਸਿਆ ਭਉ ਭਗਤ ભગવાન ਹਿਤ ਮਾਇਆ ਲਿਪਤਨ ਰਚ ਜਿਹੜੀ ਭਉ ਭਗਤੀ ਹੈ ਨਾ ਪ੍ਰੇਮਾ ਤੋਂ ਸੀ ਗੁਰਬਣੀ ਦੀ ਇਹ ਭਗਵਾਨ ਵਾਸਤੇ ਹੈ ਲੋਕਾਂ ਵਾਸਤੇ ਨਹੀਂ ਆ ਲੋਕਾਂ ਵਾਸਤੇ ਭਗਤੀ ਨਹੀਂ ਕੀਤੀ ਅਸੀਂ ਆਪਣੇ ਵਾਸਤੇ ਕੀਤੀ ਹੈ ਭਗਤ ਭਗਵਾਨ ਹਿਤ ਮਾਇਆ ਲਿਪਤਨ ਰਚ ਕੁਆਟ ਪਰ ਬਿਮਾਰਾ ਚਲਪਤੀ ਰਹਦਾ ਬਿਰਲੇ ਕਈੇ ਨਾਨਕਾ ਜੇਰ ਨਾਲ ਚੇ ਪਰਪੰਚ ਇਤੋਂ ਕੋ ਬਿਰਲਾ ਗਾਣ ਜਾਂਦਾ ਜਿਹੜਾ ਪਰਪੰਚ ਨਹੀਂ ਰਹਦਾ ਨਹੀਂ ਤਾਂ ਇੱਥੇ ਪਰਪੰਚ ਹੀ ਲੈਂਦੇ ਨੇ ਬڑے بڑے ਢੇਰੇ ਬਣਾ ਲੈਂਦੇ ਨੇ ਇੱਕ ਬਣਾ ਲਿਆ ਦੋ ਬਣਾ ਲਏ ਚਾਰ ਬਣਾ ਲਏ 10 ਬਣਾ ਲਏ 100 ਬਣਾ ਲਏ ਸੱਖੇ ਰਹਿ ਜਾਂਦੇ ਠੀਕ ਹੈ ਜੀ ਕੋਲ ਬਾਂ ਸਾਲੇ ਬਣਾ ਲਏ ਫਸ ਗਿਆ ਮਾਇਆ ਜੇ ਭਗਤਾਂ ਨੂੰ ਰਿਹਾ ਜਿਵੇਂ ਰਵਿਦਾਸ ਰਹੇ ਨਾਨਕ ਰਹੇ ਪਟੰਕ ਕੋ ਗੱਲ ਦਸਣੀ ਹੈ ਲੋਕਾਂ ਨੂੰ ਕੋਈ ਛੋੜਾ ਕੋਈ ਨਾ ਸੁਣੂ ਠੀਕ ਹੈ ਜੋ ਗੱਲ ਪਾਲੀ ਜੋ ਪਾਲਿਆ ਉਹ ਦੱਸਣਾ ਜ਼ਰੂਰ ਹੈ ਦੱਸ ਦੇਣਾ ਹਾਂਜੀ ਗੁਰ ਸਤਗੁਰ ਸਾ ਜੋ ਸਿੱਖ ਅਖਾਏ ਇਹ ਕਿਉਂ ਕਿ ਹੈ ਇੱਥੇ ਗੁਰੂ ਬਣਿਆ ਕਿ ਸੰਤਰੀ ਬਣ ਜੇ ਤਾਂ ਬਣ ਗਿਆ ਗੁਰੂ ਅਰਥਰਤ ਹਾਂਜੀ ਫੇਰ ਤੇ ਇਹ ਹੋਣਾ ਕੀ ਹੈ ਕਿ ਆ ਕੇ ਗੁਰ ਸਾਥ ਗੁਰਤਾ ਸਿੱਖ ਕੋ ਹੁਣ ਫਿਰ ਬਚੂਗਾ ਨੀਵਾ ਹੋਣਾ ਨੀਵੇਂ ਸਵਾਰਾ ਹੋਇਆ ਨਾਲ ਸਿੱਖਾਂ ਗੁਰ ਸਾਥ ਗੁਰਤਾ ਗੁਰੂ ਨਹੀਂ ਹੈਗਾ ਦਾਸ ਨਾਲ ਕਹਿਣਾ ਹੋਏ ਤੇਰੇ ਦਾਸਨ ਦਾਸਾ ਜਿਹੜੇ ਤੇਰੇ ਪਹਿਲਾਂ ਦਾਸ ਹੋ ਚੁੱਕੇ ਮੇਰੇ ਤੋਂ ਪਹਿਲਾਂ ਮੈਂ ਉਹਨਾਂ ਦਾਸ ਹਾਂ ਉਹ ਕੌਣ ਨੇ ਤੁਹਾਡੇ ਲਈ ਕਬੀਰ ਸਲੋਚਨ ਨਾਮਦੇਵ ਤਸਾਂ ਯਾ ਦੇਵਾ ਉਹ ਸਾਰੇ ਜਿਹੜੇ ਤੇਰੇ ਦਾਸ ਨੇ ਉਹਨਾਂ ਦਾ ਦਾਸ ਆ ਦਾਸ ਸਿੱਖ ਹੈ ਉਹ ਤੇਰੇ ਦਾਸਾਂ ਦਾਸਾ ਤੂੰ ਵੀ ਕਹਿੰਦਾ ਗੁਰੂ ਹੈ ਗੁਰਬਾਣੀ ਸੱਚਕ ਹੋਊਗੀ ਉਹਨਾਂ ਨੂੰ ਤਾਂ ਗੁਰ ਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਰਾਮ ਤੇ ਆਵੇ ਹਰ ਜਵਾਸ ਦਾ ਦੇਬ ਜੇ ਬਸ ਫਤਗੁਰ ਦਾ ਸਿੱਖ ਬਣੇ ਲੱਕ ਕਿ ਸਾਧਗੁਰ ਤੋਂ ਖਾਲੀ ਕੋਈ ਨਹੀਂ ਸਾਧਗੁਰ ਸਾਡੇ ਨਾਲ ਜੱਤਰ ਹੂੰ ਹੂੰ ਆਪਣੇ ਅੰਦਰ ਆਤਮਾ ਦੇ ਆਵਾਜ਼ ਦਾ ਸਿੱਖ ਬਣ ਬਦਲੇ ਇਹ ਜਿਹੜੇ ਕਿਸੇ ਦਾ ਬਣਦੇ ਲੋੜ ਨਹੀਂ ਆ ਪਰ ਆਪਣੇ ਅੰਦਰ ਹੀ ਬੈਠੀ ਹੈ ਉਹਦੀ ਉਹ ਗੱਲ ਵੱਡੀ ਉਹਦਾ ਸਿੱਖ ਬਣਦੇ ਉਹ ਹੀ ਤਾਂ ਗੁਰਬਾਨੀ ਜਿਹੜੀ ਗੁਰਬਾਨੀ ਕਰਾ ਹੋਰ ਕੁਸਤ ਨਹੀਂ ਜਿਹੋ ਹੀ ਜਰਦੀ ਹੈ ਗੁਰਬਾਨੀ ਜਦ ਤਰਾਤ ਉਹ ਕਹਦੀ ਹੈ ਜੋ ਪਲਕੇ ਉੱਤ ਹਰ ਲੋਕ ਧਿਆਵਾ ਪਲਕੇ ਕਹਿੰਦੇ ਨੇ ਪਲਕੇ ਵੀ ਜਦੋਂ ਚੜਨਾ ਉਹ ਤਾਂ ਪਹਿਲਾਂ ਪਲਕ ਖੁੱਲਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਜੋ ਸੂਰਜ ਚੜਿਆ ਨਹੀਂ ਰਾਤ ਹੈ ਜੇ ਮੋੜੇ ਰਾਜਾ ਹੈਗਾ ਪੌ ਫੱਟ ਗਈ ਪੌ ਫੱਟ ਗਈ ਕਹਿੰਦੇ ਨੇ ਯਾਨੀ ਹੋ ਗਿਆ ਰਾਤ ਰਹੀ ਨਹੀਂ ਦਿਨ ਵੀ ਹੈ ਉਪਰ ਕੁਦ ਯਾਨੀ ਗਿਆਨ ਹੋ ਗਿਆ ਤੇ ਚਾਨਣਾ ਹੋ ਗਿਆ ਸੂਰਜ ਦਿਖਿਆ ਦੀ ਗੁਰਮਤਿ ਦੀ ਸੋਚੀ ਅਜੇ ਸ਼ਬਦ ਗੁਰੂ ਕੋਲ ਸੰਪਰਕ ਹੋਇਆ ਨਹੀਂ ਗੁਰਬਾਣੀ ਦਾ ਗਿਆਨ ਸਾਰਾ ਸਮਝ ਲਿਆ ਪਰ ਸ਼ਬਦ ਗੁਰੂ ਦਾ ਅੰਦਰੋਂ ਗਿਆਨ ਨਹੀਂ ਪਹੁੰਚਿਆ ਹੋਇਆ ਉਧਰ ਇੱਕ ਹੋ ਗਿਆ ਉਹ ਗਿਆ ਤਦੋਂ ਨਹੀਂ ਗਿਆ ਤੁਰਕੀ ਬਾਣੀ ਜੁੜੀ ਜਦੋਂ ਬਨਾ ਕਰਨਾ ਤੁਰਕੀ ਬਾਣੀ ਨਹੀਂ ਹੋਣ ਲੱਗੀ ਗੁਰਬਾਣੀ ਵੀ ਸਾਡੀ ਕੇ ਬੈਠ ਗਿਆ ਉਹ ਝੁੱਤੇ ਬੈਠੇ ਜੀਰਾਂ ਨੂੰ ਕੁਛ ਕਹਿਰਦਾ ਸਿੱਧਦਾ ਪੂਰਾ ਕਰਕੇ ਖਾਦਾ ਤੇ ਗੁਰਦਲਿਆ ਉੱਤੇ ਬੰਦੀ ਗਿਆ ਸਭ ਲੋਕਾਂ ਦੀਆਂ ਦਲੀਲਾਂ ਸਭ ਗੱਲਾਂ ਸਭ ਕਹਾਣੀਆਂ ਬੰਦੀ ਗਿਆ ਅੰਧ ਬੋਤਾਂ ਅੰਧ ਉੱਠ ਕੇ ਬੈਠ ਜਾ ਜਦ ਉੱਠ ਕੇ ਬੈਠ ਜਾਂਦਾ ਸੁਪਨਾ ਨਹੀਂ ਹੁੰਦਾ ਮਤਲਬ ਹੈ ਦੀ ਅਵਸਥਾ ਜੋ ਆ ਰਹੀ ਹੈ ਉੱਠਾ ਬਗ ਸੁਪਨਾ ਦੀ ਅਵਸਥਾ ਜੋ ਬਹੁਤ ਰਿਹਾ ਸੁਪਨਾ ਨਹੀਂ ਸੱਚ ਕਰਕੇ ਵੀ ਜਾਣ ਰਿਹਾ ਇੰਨਾ ਉਹ ਹਲਕੇ ਉੱਠ ਚੱਲ ਚੱਲਣਾ ਹੋ ਜਾਣਾ ਹੁਣ ਉੱਠ ਕੇ ਬੈਠ ਜਾਣਾ ਇਹ ਤਾਂ ਸਾਰੀ ਇਹ ਸੰਸਾਰ सगला ਹੈ ਸੁਪਨਾ ਇਸ ਵਰਤਨ ਨੂੰ ਵਿਸ਼ਵਾਸ ਹੋ ਜਾਣਾ ਵੀ ਗਵਾਣੀ ਸੱਚ ਕਹਿਦੀ ਗੁਰਬਾਣੀ ਤੇ ਵਿਸ਼ਵਾਸ ਹੋਣ ਲੱਗ ਜਾਣਾ ਉਹਨੂੰ ਹੋ ਜਾਣਾ ਮਾਰੀ ਤੇ ਵੀ ਇਹ ਤਾਂ ਵਾਕਈ ਸੁਫਲਈ ਹੈ ਮੈਨੂੰ ਪਤਾ ਲੱਗੂ ਜਾਂ ਕਿਤੇ ਬਾਹੂ ਸੁਫਨਾ ਹੈ ਹੈ ਹੈ ਠੀਕ ਹੈ ਜੀ ਜੋ ਭਲਕੇ ਹਰ ਨਾਮ ਤੇ ਆਏ ਆ ਨਾਮ ਦੇ ਵਿੱਚ ਧਿਆਨ ਜੁਰੂ ਵੀ ਹੁਣ ਮੈਂ ਇਹਨੂੰ ਨਾਮ ਸੁਣੂਗਾ ਤੋਪ ਸੁਣੂਗਾ ਹਉ ਤੀ ਬਾਣੀ ਆਉਂਦੀ ਕਿ ਤੇ ਸੁਣ ਵਾਲੀ ਬਾਣੀ ਹੁਣ ਮੈਨੂੰ ਗੁਰੂ ਵੀ ਇਸ ਧਿਆਨ ਦੇ ਵਿੱਚ ਬੈਠ ਜੂਗਾ ਉਹ ਗਿਆਨ ਦੀ ਅਵਸਥਾ ਜਦੋਂ ਦੋਤੇ ਆਣਾ ਅੰਤਰਾਤਮਾ ਅੰਦਰੋਂ ਜਿਹੜੀ ਬਾਣੀ ਆਉਣੀ ਹੈ ਤੁਰਕੀ ਬਾਣੀ ਉੜੀਆਂ ਸੋਡੀਆਂ ਉਹ ਤੇ ਅੰਗੂ ਔਰ ਦੁਨੀਆਂ ਨਾਲ ਸਾਂਟੋੜੀਂ। ਸੋ ਭਲਕੇ ਉਠ ਹਰ ਰੋਮ ਆਵੇ। ਆਵੇ। ਮੰਮੀ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਇਹ ਦੀ ਐ ਬੈਠਾ ਹੀ ਰਹਦਾ ਹੈ ਉਹ। ਨਾ ਬੈਠਾ ਹੀ ਰਹਿਆ ਉਦਮ ਵੀ ਕਰਵਾ ਰਿਆਂ। ਵਰਵਾਣੇ ਨੂੰ ਹੋਰ ਵਿਚਾਰਦਾ ਰਹਿੰਦਾ ਹੈ ਕਿ ਜੇ ਰਹੀ ਵੇ ਨੂੰ ਛੋੜੇ ਤਾਂ ਕੀ ਹੈ ਫਿਰ ਇੱਕ ਗਲਤੀ ਹੈ ਆਪਣੇ ਅੰਦਰ ਝਾਕਦਾ ਰਹਿੰਦਾ ਹੈ ਫਿਰ ਬੋਲ ਕੇ ਕਾਲੇ ਗੱਲ ਹੈ ਹੁਣ ਬਹੁਤਾ ਜੋਨੇ ਤੂੰ ਕੀ ਕਾਲਾ ਤੂੰ ਬੋਲ ਹੈ ਮੈਨੂੰ ਤੂੰ ਬੋਲਿਆ ਤਾਂ ਮੈਂ ਤੈਨੂੰ ਮੈਂ ਤੈਨੂੰ ਛੋੜਨੂ ਵੇ ਕਾ ਤੂੰ ਬੋਲਦਾ ਨਹੀਂ ਬਹੁਤ ਜਨਮ ਕਿਸ਼ਣੇ ਤੇ ਮਾਰੋ ਉਹ ਜਨਮ ਤੇ ਮਾਰੇ ਬਹੁਤ ਜਨਮ ਹੋ ਗਿਆ ਤੇ ਖੜੇ ਤੇਰੇ ਨਾਲੋ ਸੱਚ ਸੇਸਾ ਵਾਇਨਾ ਲੋ ਸੱਚਖੰਦ ਦੇ ਹੁਕਮਾਂ ਵਿੱਚ ਨੇ ਬਹੁਤ ਚਿਰ ਹੋ ਗਿਆ ਬਹੁਤ ਦੇਰ ਹੋ ਗਈ ਮੈਂ ਨੇ ਸੁਣਦਾ ਹੁੰਦਾ ਸੀ ਬਹੁਤ ਯਾਰ ਲੈ ਲੈ ਬਿਛਰੇ ਤੇ ਆਦੋ ਇਹ ਜਨਮ ਤੁਹਾਰੇ ਲੈ ਕੇ ਤੇ ਜਿਹੜਾ ਹੁਣ ਜਨਮ ਹੋਊਗਾ ਮੇਰਾ ਸੁਣਦੀ ਥਾਰੇ ਜਨਮ ਹੋਣਾ ਆਪ ਸੁਣਦੀ ਸਾਰੇ ਨੇ ਜੋਣਾ ਜੋਦਾ ਹੋਣਾ ਬੜਿਆ ਹੋਇਆ ਹੈ ਇਹ ਇਹ ਵਸਤਾ ਬੜਿਆ ਹੋ ਗਿਆ ਮੁਕਤ ਮੁਕਤ ਹੈ ਮੁਕਤ ਸ਼ਬਦ ਨਾਲ ਬੜਿਆ ਹੋਇਆ ਹੈ ਮਾਰਿਆ ਫੁੱਲ ਜੀਵ ਹੈ ਤੁਰਕੀ ਬਾਣੀ ਫਿਰ ਬੋਲੂਗਾ ਫਿਰ ਉਹ ਜੋ ਬੋਲੂਗਾ ਉਹ ਜਨ ਉਹਦੇ ਲੇਖੇ ਲਾਊਗਾ ਫਿਰ ਉਹਦੀ ਉਹ ਗੱਲ ਕਰੂਗਾ ਹੋਰ ਕੋਈ ਗੱਲ ਨਹੀਂ ਕਰੂਗਾ ਗੱਲ ਉਹਦੀ ਉਹ ਕਰੂਗਾ ਜੀ ਜਾਈ ਆਸ ਲੱਗ ਜੀਵਾ ਉਹ ਬਦਾਸ਼ ਕਹਿੰਦਾ ਮੈਨੂੰ ਤਾਂ ਕਿਉਂ ਦੀ ਲੋੜ ਨਹੀਂ ਮੈਂ ਤਾਂ ਇਸ ਆਸ ਦੇ ਵਿੱਚ ਜੀ ਜਿਉਂਦੇ ਹਾਂ ਸਾਹ ਲੈ ਰਿਹਾ ਦੇ ਕੇ ਦਰਸ਼ਨ ਦੇਖੇ ਨੂੰ ਜੇਰ ਹੋ ਗਿਆ ਮੈਂ ਦਰਸ਼ਨ ਦੇਖਣ ਵਾਸਤੇ ਕੋਈ ਲੋੜ ਨਹੀਂ ਫਿਰ ਦਰਸ਼ਕਾਂ ਦੇ ਕੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਉਦਮ ਕਰੇ ਭਲਕੇ ਪਰਬਤੀ ਰੋਜ਼ ਉਦਮ ਕਰਦਾ ਉਹ ਰੋਜ਼ ਉਦਮ ਕਰਦਾ ਬਾਣੀ ਸੁਣੇ ਆਪਣੇ ਕਮੇ ਨੂੰ ਰੋਹ ਧਿਆਨ ਕਰਦਾ ਕਿੱਥੇ ਕਮੀਆਂ ਮੇਰੇ ਚ ਵਿਰੇ ਚ ਕਿਤੇ ਕਮੀਆਂ ਤਾਂ ਦੀ ਸੁਣਦੀ ਬੋਲੀ ਕਿ ਉਦਮ ਕਰਦਾ ਕਮੀਆਂ ਦੂਰ ਕਰਨ ਦੀ ਹਲਕੇ ਪਰਬਤ ਜਿਨਾਬ ਗਰਾਹ ਨਾ ਨਾਵਾ ਹਾਂਜੀ ਨਾ ਆਵੇ ਨਾ ਹਾਵੇ ਲਖ ਹੈ ਅੱਛਾ ਉਹ ਕਿਹਾ ਅਸਰਦ ਕਰਨਾਵ ਹਾਂਜੀ ਪਤੰਕਥਾਂ ਹਾਂਜੀ ਨਾਮ ਦਾ ਬਹੁ ਬਚਣਾ ਨਾਮ ਹੈ ਠੀਕ ਹੈ ਕਰਦਾ ਹੈ ਉਹਦਾ ਦੇ ਸਾਧਨ ਦੇ ਗੁਣ ਤਾਲ ਕਰਦਾ ਕਿਸੇ ਗੁਣ ਚ ਮੇਰੇ ਕੋਈ ਕਮੀ ਨਹੀਂ ਹੈ ਕਿਸੇ ਪੱਖ ਚ ਗੁਣ ਦੀ ਕਮੀ ਨਹੀਂ ਕੋਈ ਨਹੀਂ ਕੀ ਮਾ ਧੱਕੇ ਇਹਦੇ ਹਾਂ ਵੇਣੀ ਨਿਰਵਰਤਕ ਕਵਿਤਾ ਨਹੀਂ ਕਿਤੇ ਹਮ ਦੇਸ਼ ਦੇ ਕਿਤੇ ਬੈਰੀ ਵਗਾਂ ਦਾ ਨਹੀਂ ਮਾਪਨ ਦਾ ਕਿਤੇ ਬਹੁਤ ਬੈਰੀ ਵਗਾਂ ਨੂੰ ਬੋਲਦਾ ਹੁੰਦਾ ਆਪਣਾ ਪਰਾਇਆ ਮੈਨੇ ਬਿਲਕੁਲ ਹੈ ਥੋੜੀ ਬਹੁਤ ਅੰਸ਼ ਕੋਈ ਕੋਈ ਨਾ ਕੋਈ ਜਲਤੀ ਮੇਰੇ ਤੇ ਤਾਂ ਵੀ ਬਾੜੀ ਸੁਣਦੀ ਇਹ ਗੱਲ ਦਾ ਉਦਮ ਕਰਦਾ ਹੋ ਆਪਣਾ ਆਪ ਦਾ ਕਿਰਤ ਕਰਦਾ ਆਪਣੇ ਆਪ ਨੂੰ ਦੇਖਦਾ ਆਪਣੇ ਦਰਬਾਰ ਵਿੱਚ ਜਮੀਰੋ ਕਰਕੇ ਦੇਖਦਾ ਉਹ ਜਿੱਦਾਂ ਆਪਣੇ ਸਮੇਂ ਦੂਰ ਹੋ ਗਈ ਪਾਣੀ ਛੁੱਟ ਜਾਣੀ ਇਹ ਉਹ ਪਤਾ ਠੀਕ ਹੈ ਜੀ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਪਾਪ ਦੁਖ ਲਹਿ ਜਾਵੇਂ ਦਾ ਦਿੱਤਾ ਹੋਇਆ ਹੈ ਹਾਂ ਫਾਂਵੇਂ ਬੋਲਿਆ ਵੀ ਹੈ ਦਾ ਉਪਦੇਸ਼ ਕੀਤਾ ਉਪਦੇਸ਼ ਗੁਰੂ ਇਹ ਵੀ ਪਹਿਲੇ ਖਾਪੇ ਜਾਂਦਾ ਮਹਿਨਾਰ ਕਨੇ ਉਪਦੇਸ਼ ਕੀਤਾ ਨੇ ਫਿਰ ਤਾਂ ਭਗਤ ਵੀ ਗੁਰੂ ਹੈ ਨੇ ਚਲੋ ਜੇ ਇਹ ਉਪਦੇਸ਼ ਨੂੰ ਗੁਰੂ ਮੰਨ ਲਈਏ ਪੰਜ ਨੂੰ ਫਿਰ ਗੁਰੂ ਹੈ ਨੇ ਗੁਰੂ ਹਨ ਸਾਰੇ ਗੁਰੂ ਦੇ ਅਸਰ ਕੇ ਬੋਦਦਾਲ ਨਹੀਂ ਰਹੇ ਸੀ ਤੇ ਹੁਣ ਰਹੇ ਪਾਰਟੀ ਹੋ ਗਏ ਛੜੇ ਵੱਡੀਆਂ ਹੋ ਗਈਆਂ ਉਹਦੇ ਜਿਹੜੋਂ ਦੂ ਦਾ ਉਪਦੇਸ਼ ਹੈ ਬਾਲੀ ਬਹੁਤ ਬਾਣੀ ਬਿਲੋ ਵਿਚਾਰਸੀ ਜੇ ਕੋ ਗੁਰਮਖ ਹੋਏ ਇਹ ਬਾਣੀ ਬਾਹਾਂਪੁਰਖ ਦੀ ਤੀਤਿਓ ਬਾਣੀ ਹੈ ਇਹ ਬਾਹਾਂਪੁਰਖ ਦੀ ਉਹ ਗੁਰੂ ਹੈ ਬਾਕੀ ਆnde ਤਾਂ ਬੁਲਾਇਆ ਹੈ ਉਹ ਤਾਂ ਬੁਲਾਏ ਬੋਲੇ ਨੇ ਸਾਰੇ ਉਹਨਾਂ ਦੀ ਬਾਣੀ ਨਹੀਂ ਹੈ ਕੋਈ ਬੋਲਿਆ ਬੁਲਾਇਆ ਬੋਲਿਆ ਇਹ ਗੁਰੂ ਦਾ ਉਪਦੇਸ਼ ਹੈ ਪਰਮੇਸ਼ਰ ਦਾ ਉਪਦੇਸ਼ ਹੈ ਪਰ ਹਰ ਚੱਪ ਹਰ ਦਾ ਇਹਦੇ ਚ ਹਰ ਕੀ ਹੈ ਹਰ ਬਾਾਰੇ ਗਿਆਨ ਹੈ ਕੌਣ ਹਰੇ ਕੋਣ ਆ ਜਿਹੜਾ ਤਨ ਜੀ ਦੇ ਨਾਲ ਹਰਿਆ ਇਹਦਾ ਨਾ ਬਹੁਤ ਹਰਿਆ ਇਹਦਾ ਨਾ درخت ਹਰੇ ਨੇ ਜਿਹੜੀ ਆਤਮਾ ਹਰ ਹੈ ਹਰਤਾ ਰੂਪ ਆ ਹਰ ਅਗਰੇ ਹੈ ਤੇ ਹਰ ਦੇ ਵਿੱਚੋਂ ਹਰ ਦੀ ਜੋਤ ਨਾਲ درخت ਹਰੇ ਨੇ ਹਰ ਦੀ ਜੋਤ ਨਾਲ ਸਰੀਰ ਹਰ ਨੂੰ ਹਰ ਦੀ ਜੋਤ ਨੂੰ ਜਾਣਦਾ ਇਹਦਾ ਜਪ ਜਾਪਦਾ ਤਨ ਮਿੱਤੋ ਮਨ ਨੂੰ ਖੋਜਦਾ ਮਨ ਵਿੱਚੋਂ ਉਹਨੂੰ ਖੋਜਦਾ ਹੈ ਜੀ ਜੋ ਮਨ ਪੈਦਾ ਹੋਇਆ ਹੋਇਆ ਹੈ। ਸਾਮ ਸਰੀਰ ਵਿੱਚੋਂ ਮਨ ਨੂੰ ਹੋਇਦਾ ਜੋ ਸਰੀਰ ਹਰਾ ਕਰਕੇ ਆਤਮਾ ਦੇ ਵਿੱਚ ਪ੍ਰਾਤਮਾ ਨੂੰ ਖੋਜਦਾ ਹੈ। ਜੋਤ ਦੇਖਦਾ ਸਰੀਰ ਵਿੱਚ ਜੋਤ ਹੈ। ਆਤਮਾ ਜੋਤ ਜੋਤਾਂ ਜਾਂ ਤਾਂ ਜੋਤ ਦੇ ਵਿੱਚੋਂ ਜਾਣ ਦੀ ਕੋਸ਼ਿਸ਼ ਕਰਦਾ ਮੈਨੂੰ ਸਤਾਰਿਖ ਤੋਂ ਪਦੇਖਦਾ ਤੂੰ ਆਪਣੇ ਵਿਚਾਲੇ ਸੂਰਜ ਦੇਖਦਾ ਓਹੋ ਉਹ ਸੂਰਜ ਤੋਂ ਤੂੰ ਪਦੇਖਦਾ ਪਦੇਖ ਤੂੰ ਹਰ ਹਰ ਦਾ ਪਟਾਪਾ ਸਭ ਕਿਲਵਿਕ ਪਾਪ ਦੋਖ ਖੜੇ ਜਾਵਣ ਸਾਰੇ ਕਿਲਵਿਕ ਪਾਪ ਤੇ ਦੋਖ ਪੈਦਾ ਹੋਏ ਨਾ ਸੀ ਸਾਰੀ ਉਹ ਉਹ ਰੀਜਕੂਰੀ ਹੁੰਦੀ ਦੁਖੀ ਹੁੰਦਾ ਸੀ ਤੇ ਛੱਡ ਦਿੱਤੀਆਂ ਦੋਖ ਲੈ ਜਾਂਦੇ ਜਿਹੜੇ ਦੋਖ ਤੇ ਸਾਰੇ ਲੈ ਜਾਂਦੇ ਉਹ ਭੌਮੇ ਨਾਲ ਸਭ ਲੋੜੇ ਦੀ ਉਹ ਠੀਕ ਹੈ ਉਹ ਦੇ ਲੈਪੇ ਚੱਕ ਪਾਏ ਜੁਗਾਂ ਜੀ ਦਾ ਅੰਦਰ ਖਾਈ ਥਾਏ ਦਈ ਜਾਂਦਾ ਲੈਣ ਵਾਲੇ ਦਿੱਕੀ ਜਾਂਦੇ ਨੇ ਤੁਸੀਂ ਫੇਸਬੁਕੀ ਜਾਂਦੇ ਫਿਰ ਗੁਰਬਾਣੀ ਗਾਵੇ ਬਹਿੰਦੀਆਂ ਉੱਠਦੀਆਂ ਹਰ ਫੇਰ ਚੜਦਾ ਦੇ ਵਿੱਚ ਉਹ ਤੋਂ ਬਾਅਦ ਉਹਦੇ ਉੱਧਰ ਸੂਰਜ ਪ੍ਰਗਟ ਹੁੰਦਾ ਹੈ ਦਿਨ ਚੜਦਾ ਹੈ ਜੇ ਸੂਰਜ ਕਹੇ ਕਬੀਰ ਮਨ ਪਿਆ ਪਰਗਾਸਾ ਉੱਦੇ ਭਾਨ ਜਦ ਕਿਦ ਸੂਰਜ ਚੜਿਆ ਹੁੰਦਾ ਫਿਰ ਸਭ ਗੁਰੂ ਪ੍ਰਗਟ ਹੋ ਜਾਂਦਾ ਫਿਰ ਚੜਦਾ ਦੇ ਵਿੱਚ ਗੁਰਬਾਣੀ ગાਦਾ ਫੇਰ ਗੁਰਬਾਣੀ ਉਹ ਸਵਸਥਾ ਦੇ ਕਿਉਂ ਕੀਤੀ ਹੈ ਗੁਰਬਾਣੀ ਬੈਂਦੇ ਹੜਦੇ ਹਰ ਲੋਕ ਤੇ ਆਵੇ ਜੋ ਬੈਂਦੇ ਹੜਦੇ ਹਰ ਨਾਮ ਦੇ ਵਿੱਚ ਜੁੜਿਆ ਰਹਿੰਦਾ ਔਰ ਕੋਈ ਕੰਬ ਨਹੀਂ ਉਹ ਹੋਰ ਸਵਾਲ ਮੇਰੇ ਕੋਲ ਆਵੇ ਕੋਈ ਸਲਾਹ ਹੋ ਲੈਣ ਪ੍ਰਾਣੀ ਆਇਓ ਸਲਾਹ ਲੈਣ ਕੀ ਲਾਹ ਲੈਣ ਕਿ ਮੈਂ ਤੈਨੂੰ ਬਿਲੂਆ ਇਹ ਸਵਾਲ ਕਰੇ ਆਪੇ ਜੀ ਇਹਨਾਂ ਗੱਲਾਂ ਨੇ ਆਪਣੇ ਘਰੇ ਬੈਠੇ ਮੇਰੇ ਗੋਮ ਦੀ ਲੋੜ ਏਕ ਕੋਈ ਮੈਨੂੰ ਨਾਲ ਦਿੱਸਦੀ ਨਹੀਂ ਕੋਈ ਕਿਸੇ ਦਾ ਮੇਲਾ ਲੱਗਦਾ ਨਹੀਂ ਮੈਨੂੰ ਕਿਸੇ ਨੂੰ ਲੱਗਦਾ ਨਹੀਂ ਇਹ ਉਸ ਤਰ੍ਹਾਂ ਹੀ ਗੱਲ ਹੈ ਜਿਵੇਂ ਭਗਤ ਕਬੀਰ ਜੀ ਕਹਿੰਦੇ ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਔਰ ਜਾਗ ਅਵਸਥਾ ਹਾਂਜੀ ਊਟਾ ਦਰਜ ਚਲੇ ਆਇਆ ਸੂਰਜ ਲਾਗ ਅਗਲੀ ਅਗਲੀ ਵੀ ਤਾਂ ਹੈ ਹਾਂ ਉਹ ਜਦ ਦੇ ਜੜੂ ਵਾਸਾ ਸੂਰਜ ਜੜੂ ਗਾਉਦਾ ਨਾ ਚੜੂ। ਜੇ ਸੂਰਜ ਚੜਿਆ ਦਿਖੂਗਾ ਜੇ ਸੋង ਕੀ ਪਤਾ ਲੱਗਣਾ ਕਿ ਚੜਿਆਗਾ ਛੁਪ ਗਿਆ। ਠੀਕ ਹੈ ਜੀ। ਗੁਰੂ ਮਨ ਭਾਵ ਦੇਖੋ ਜਿਹੜਾ ਸਾਸ ਗਰਾਸ ਤੇ ਮੇਰਾ ਹਰ ਹਰ ਸਾਸ ਹੈ। ਮੇਰਾ ਹਰ ਹਰ ਤੇ ਆਵੇ। ਜਦ ਪਹਿਲੀ ਸਟੇਜ ਹੈ ਸਿਰਫ ਦੋ ਸਟੇਜ ਹੈ ਤੀਜੀ ਸਟੇਜ ਤੇ ਬੋਲਣਾ ਵੀ ਲੈ ਸਕਦਾ ਰੋਟੀ ਵੀ ਖਾ ਸਕਦਾ ਹੈ ਵਿਅਕਤੀ ਖਾ ਕੇ ਜੇ ਰੋਟੀ ਖਾ ਜਾ ਰਾਮ ਨਹੀਂ ਕਹਿ ਸਕਦਾ ਵੈਰ ਨਹੀਂ ਕਹਿ ਸਕਦਾ ਪਰ ਸਾਹ-ਕਰਾਸ ਧਿਆਨ ਹੋ ਸਕਦਾ ਠੀਕ ਹੈ ਜੀ ਟੱਟਿਆ ਜਾ ਸਕਦਾ ਬੋਲਿਆ ਨਹੀਂ ਜਾ ਸਕਦਾ ਪਰ ਧਿਆਨ ਰਹਿ ਸਕਦਾ ਬੋਲਿਆ ਨਹੀਂ ਜਾ ਸਕਦਾ ਹਾਂ ਰੱਖਿਆ ਜਾ ਸਕਦਾ ਹਾਂ ਇਹ ਜਦੋਂ ਤੱਕ ਪ੍ਰੇਤ ਪ੍ਰਗਟ ਹੋਵੇ ਆਪੇ ਚੁੱਪ ਕਰ ਚਲ ਜੇ ਠੀਕ ਹੈ ਜੀ ਛੋ ਗੁਰ ਸਿੱਖ ਗੁਰੂ ਮਨ ਭਾਵ ਹੈ ਛੋ ਗੁਰ ਸਿੱਖ ਉਹ ਖਰਾ ਖਜ਼ਾਨੇ ਪੈ ਜਾਂਦਾ ਹੈ ਗੁਰ ਸਿੱਖ ਦੇਖੋ ਸਿੱਖੀ ਦਾ ਗੁਰਦਵਾਰ ਸਤ ਜੇ ਕਿਤਾਬੋਂ ਨਰਕ ਤਾਂ ਹੈ ਪਰ ਪਰਮੇਸ਼ਰ ਤੋਂ ਆਉਂਦਾ ਹੈ ਆਇਲ ਗੁਰ ਚੱਕਾ ਆਇਲ ਤੂੰ ਮੇਰੇ ਗੁਰੂ ਕੇ ਪਿਆਰੇ ਹਾਂ ਜੀ ਤਾਂ ਕਹ ਰਿਹਾ ਸਤਗੁਰ ਕਹ ਰਿਹਾ ਆਇਲ ਗੁਰ ਚੱਕਾ ਆਇਲ ਤੂੰ ਮੇਰੇ ਗੁਰੂ ਕੇ ਪਿਆਰੇ ਮੇਰੇ ਗੁਰੂ ਕੇ ਪਿਆਰੇ ਤੂੰ ਗੁਰ ਚੱਕਾ ਗੁਰੂ ਮਨ ਭਾਵ ਠੀਕ ਹੈ ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਗੁਰੂ ਉਪਦੇਸ਼ ਸੁਣਾਵੇ ਉਹਨੂੰ ਗੁਰੂ ਫਿਰ ਸਿੱਧਾ ਗੁਰੂ ਉਪਦੇਸ਼ ਮਿਲਦਾ ਸਿੱਧਾਈ ਰੋ ਕਿਸ ਗੁਰਸਿੱਖਾ ਗੁਰੂ ਉਪਦੇਸ਼ ਸੁਣ ਆਵੇ ਗੁਰੂ ਉਪਦੇਸ਼ ਆਪਣਾ ਦਾਇਆ ਕਰ ਤੁਹਾਨੂੰ ਤੁਰਤੀ ਬਾਣੀ ਦਿੰਦਾ ਆਪਣਾ ਉਪਦੇਸ਼ ਨੂੰ ਗੁਰੂ ਆਪਣੇ ਉਪਦੇਸ਼ ਨੂੰ ਛੋੜਦਾ ਹੈ ਫੇਰ ਆ ਤੁਰਕੀ ਬਾਣੀ ਆਈ ਤਨ ਸਗਲੀ ਚਿਤ ਫੇਰ ਬੁਲਾਇਆ ਬੋਲਦਾ ਕਸੂਦਾ ਉਨ ਸੁਣਦਾ ਗੁਰੂ ਉਪਦੇਸ਼ ਆ ਜਿਹੜੀ ਗੁਰਬਾਣੀ ਆ ਜਿਹੜਾ ਗੁਰ ਉਪਦੇਸ਼ ਠੀਕ ਹੈ ਗੁਰਬਾਣੀ ਹਾਂਜੀ ਇਹ ਉਪਦੇਸ਼ ਬਿਨਾ ਕਰਨਾ ਤੇ ਵਾਲੀ ਬਾਣੀ ਆ ਗੁਰੂ ਉਪਦੇਸ਼ ਠੀਕ ਹੈ ਜੀ ਸਵਾਮੀ ਕੌਣ ਆ ਜੀ ਕਿਉਂ ਹੋਵੇ ਮੇਰਾ ਸਵਾਮੀ ਵੀ ਪਰਮੇਸ਼ਰ ਵਾਸਤੇ ਹੀ ਤਬੀਦਾ ਹੋਈ ਐ ਸਾਰਿਆਂ ਦਾ ਬਾਨ ਕੋਈ ਐ ਹੋਰ ਮਾਲਕ ਇੱਥੇ ਕੌਣ ਜੀ ਗੋਲ ਦਾ ਸਾਥ ਕੋ ਰਹਿਤੇ ਜਾਨੀ ਉਹ ਬੰਦਾ ਖਦਮਾ ਹੋਇਆ ਹੁਣ ਤਾਂ ਬਹੁਤ ਦੇਰ ਦਾ ਬਰ ਚੁੱਕਿਆ ਉਹ ਤਾਂ ਸਮਾ ਚੁੱਕਿਆ ਆਪਣੇ ਮੂਲ ਚ ਠੀਕ ਹੈ ਜੀ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੇ ਜਾਲਨਾਨਕ ਦਾ ਆਪ ਉਸ ਸੇਖ ਦੀ ਧੂੜ ਮੰਗਦਾ ਤੋ ਟੋਲ ਕੀ ਆਂਦੀ ਐ ਉਹਦੀ ਸਿੱਖਿਆ ਦੇ ਵਿੱਚੋਂ ਜੋ ਗਿਆਨ ਆ ਉਹ ਬੰਦਦਾ ਉਹਦੇ ਜਿਹੜੇ ਬੋਲ ਨੇ ਨਾ ਬੋਲ ਉਹਦੀ ਬਾਣੀ ਸੁਣਨੀ ਚਾਹੁੰਦਾ ਉਹ ਜੋ ਬੋਲਦਾ ਨਾਨਕ ਨੂੰ ਵੀ ਲਿਆ ਰਿਆ ਉਹ ਗਿਆਨ ਕੀ ਆਂਦੀ ਆ ਜਦ ਬੋਲਦਾ ਗੁਰਸਿੱਖ ਫਿਰ ਦੇਖੋ ਭਾਈ ਗਿਆਨ ਆਈ ਜਾਂਦੀ ਉਹ ਗਿਆਨ ਕੀ ਆਂਦੀ ਵਾਲੀ ਧੂੜ ਨਾਨਕ ਵੀ ਲੋਸ਼ ਗਿਆਨ ਨਾਮ ਲੋਗ ਦਾ ਅਡਾ ਨੋਦ ਕੱਟੇ। ਨਾਲਕ ਦਾ ਖੈਰ ਹੈ। ਹਾਂਜੀ। ਅਸਲ ਇਹਦੇ ਆਸੇ ਜਿਹੜਾ। ਨਾਲਕ ਨੂੰ ਮਿਉਕੜ ਹੈ, ਜਾਨ ਨੂੰ ਮਿਉਕੜ ਹੈ। ਤੁਸੀਂ ਕੋਈ ਵੀ ਗੁਰਮਖ ਹੈ ਜਿਹੜਾ ਇਹਨੂੰ ਜਨਨ ਦੀ ਇੱਛਾ ਜਿਹਦੇ ਅੰਦਰ ਧੋਖ ਹੈ। ਉਹ ਐਸੇ ਗੁਰ ਦੀ ਤੂੜ ਨੁਕਦਾ। ਜੋ ਆਪ ਜੱਜ ਨਾਮ ਜਪਦਾ। ਹੋਈ ਜੋ ਤੁਧ ਸੱਚ ਧਿਆਇਂਦੇ ਤੇ ਵਿਰਲੇ ਥੋੜੇ ਜੋ ਮਨ ਚਿਤ ਇੱਕ ਇਰਾਦ ਦੇ ਜਿੰਨਕੀ ਬਰਕਤ ਖਾਐ ਅਸੰਖ ਕਰੋੜ ਜੋ ਤੁਧ ਸੱਚ ਧਿਆਉਂਦੇ ਤੇ ਸੱਚ ਜਿਹੜੇ ਤੇਰੇ ਧਿਆਨ ਲਖਦੇ ਨੇ ਜਿਹਦਾ ਧਿਆਨ ਝੁੱਕੇ ਮਾਇਆ ਵਾਲਾ ਟੁੱਟ ਕੇ ਤੇਰੇ ਨਾਲ ਜੁੜ ਗਏ ਜੁੜ ਗਏ ਸੱਚ ਧਿਆਇਦੇ ਉਹ ਤਾਂ ਮਿਲਦੇ ਮਿਲਦੇ ਬਹੁਤ ਥੋੜੇ ਨੇ ਕੁਰਬਾਨੀ ਦਾ ਬਹੁਤ ਥੋੜੇ ਗਏ ਨੇ ਇਹ ਤੇ ਪਤਾ ਨਹੀਂ ਕੀ ਸੋਚਦੇ ਨੇ ਅਸਲ 'ਚ ਆਪ ਸਿੱਖ ਜਿੱਦਲ ਬਹੁਤ ਹੈ ਵੀ ਬਹੁਤ ਜੋ ਮਨ ਚਿੱਤ ਇੱਕ ਰਾਜ ਦੇ ਤਿੰਨ ਕੀ ਬਰਕਤ ਖਾਣ ਅਸੰਖ ਕਰੋੜ ਜੋ ਬੋਲ ਕਰਕੇ ਇੱਛਾ ਕਰਕੇ ਇੱਕ ਹੋ ਕੇ ਆਰਾਧੇ ਦੇ ਉਹਨਾਂ ਦੀ ਜਿਹੜੀ ਬਰਕਤ ਹੈ ਨਾਲ ਜੋ ਉਹਨਾਂ ਨੇ ਪ੍ਰਾਪਤ ਕੀਤਾ ਹੈ ਪ੍ਰਾਪਤ ਕਰਕੇ ਇਹ ਲਿਖ ਕੇ ਦੱਸਿਆ ਦੁਨੀਆ ਨੂੰ ਬਰ ਦਿੱਤਾ ਹੈ ਜੁਝਬਾਣੀ ਦੱਸਿਆ ਜਾਂ ਲਿਖ ਦਿੱਤਾ ਹੋਰ ਖਾਂਦੇ ਹੋ ਲਾਹ ਲੈਂਦੇ ਨੇ ਇਹ ਸਾਡੇ ਕੋਲ ਜੀ ਕੁਰਬਾਨੀ ਨਾ ਹੁੰਦੀ ਅਸੀਂ ਕੀ ਖਾਂਦੇ ਉਹਨਾਂ ਦੀ ਉਹ ਬਰਕਤ ਹੈ ਪਹਿਲੇ ਦੀ ਉਹ ਜਿਹੜੇ ਸੰਤ ਕਰੋੜੇ ਅਸੀਂ ਖਾ ਰਹੇ ਹਾਂ ਵੇਖ ਗੁਰ ਜੀ ਦੇਗੇ ਨਾ ਸਾਨੂੰ ਕਮਾਈ ਕਰਕੇ ਅੱਖੇਵਾਂ ਜੇ ਲੈ ਕੇ ਇਹ ਕਮਾਈ ਅਸੀਂ ਖਾ ਰਹੇ ਹਾਂ ਉਹਨਾਂ ਦੀ ਅਸੰਖ ਕਰੋੜੇ ਤੁਦਨੋਂ ਸਭ ਧਿਆਈ ਦੀ ਸਭ ਧਿਆਈ ਦੀ ਸਾਰੀ ਸ੍ਰਿਸ਼ਟੀ ਵੈਸੇ ਤੱਤੇ ਹੁੰਦੀ ਹੈ ਭਾਈ ਐ ਵਿੱਚ ਪਵਨ ਚੱਲੇ ਸਦਵਾ ਉਹ ਭੈ ਵਿੱਚ ਚੱਲਣ ਬੇਗਾਰ ਭੈ ਵਿੱਚ ਗੰਤੀ ਤੇ ਬਿਬਾਦ ਜਿਹੜਾ ਤੇਰੇ ਤੋਂ ਪਹਿਲਾਂ ਹੋਇਆ ਤੇਰੇ ਜਿਹਾ ਧਿਆਨ ਹੈ ਉਹਦਾ ਤੇ ਕਰਕੇ ਤੇਰੇ ਜਿਹਾ ਧਿਆਨ ਤੇਰੇ ਹੁਕਮ ਹੁਕਮ ਬਲਟਾ ਦੇ ਤੇਰਾ ਰੱਖੂਗਾ ਤੂੰ ਤੂੰ ਸਭ ਜੋ ਸਾਹਿਬ ਲੋੜੇ ਜਗਾ ਮਿਲ ਜਾਂਦੀ ਹੈ ਜੇ ਸਾਹਿਬ ਸਾਹਿਬ ਜਿੱਤੇ ਲੋਡ ਹੁੰਦੀ ਹੈ ਉੱਥੇ ਉਹਨੂੰ ਪਿੱਟ ਕਰ ਦਿੰਦਾ ਜਿਹੜਾ ਸਾਹਿਬ ਜਿੱਤੇ ਅੰਨ ਲਖਦਾ ਸਾਹਿਬ ਉਹਦੀ ਕਾਬਲੀਅਤ ਦੇ ਅਧਾਰ ਉਹਨੂੰ ਉੱਥੇ ਉੱਠਕ ਕਰ ਦਿੰਦਾ ਵਾਈ ਟੂ ਐ ਜਿਹੜਾ ਦੇ ਕਾਬਲ ਨੂੰ ਉੱਥੇ ਆ ਜਾਂਦਾ ਕਿ ਬੇਅਧਾਰ ਉਹਦੀ ਕਾਬਲੀਅਤ ਹੁੰਦੀ ਹੈ ਉਹ ਇਹ ਥਾਂ ਨੂੰ ਡਿਊਟੀ ਦੇ ਦਿੰਦਾ ਜਿੱਤੇ ਸਾਹਿਬ ਦੀ ਇੱਛਾ ਹੁੰਦੀ ਹੈ ਲੋਡ ਹੁੰਦੀ ਹੈ ਆਪਣੇ ਲੋੜ ਅਨਸਾਰ ਉਹਦੀ ਕਾਬਲੀਅਤ ਅਨਸਾਰ ਉਹਨੂੰ ਜਗਾ ਦੇਣ। ਠੀਕ ਹੈ। ਜੋ ਬਿਨ ਸੇਵੇ ਖਾਂਦੇ ਪਹਿਨਦੇ ਤੇ ਮੂਹੇ ਮਰ ਜੰਮੇ ਕੋੜੇ। ਬਿਨ ਸਤਗੁਰ ਸੇਵੇ ਜਿਹੜੇ ਸਤਗੁਰ ਦੀ ਸੇਵਾ ਨਹੀਂ ਕਰਦੇ। ਸਤਗੁਰ ਸੇਵਾ ਸਫਲ ਹੈ ਜੇ ਕੋ ਕੋਲੇ ਚਿਤ ਲਾਏ। ਜਿਹਦੇ ਸਤਗੁਰ ਸੇਵੇ ਆ ਹੀ ਬਹੁਤ ਜ਼ਿਆਦਾ ਬੁਰ ਸ਼ਬਦ ਵਿਚਾਰ ਇਹਨਾਂ ਦੇ ਸ਼ਬਦ ਵਿਚਾਰ ਕੀਤਾ ਹੀ ਨਹੀਂ ਆਪਕੋ ਕਾਲਣਾ ਥਾਲੀ ਦੀ ਹੈ ਕਾਲ ਖਾਏ ਕਿ ਜੱਥੇ ਦੇ ਲੋਕ ਕਲਾ ਪਚਾਲਣੇ ਸੇ ਆਪ ਸਮਝਦੇ ਅਗੇ ਸਮਝਾਉਦੇ ਅਗੇ ਦਿੱਤੇ ਦੂਰ ਬਹੁਤ ਬਹੁਤ ਜਿੱਦਾਂ ਕੁਝ ਕੀਤਾ ਅੰਨ ਪਾਣੀ ਖਾਈ ਜਾਂਦੇ ਨੇ ਮਿਲੋ ਸੇਵੇ ਤੇ ਫਿਰ ਉਹ ਹੀ ਵਲੂ ਤਲ ਖਾ ਕੇ ਆਏ ਹੋਏ ਨੇ ਪਰ ਜੰਮੇ ਕੋੜੇ ਉਹ ਕੋੜੇ ਮਰ ਕੇ ਫਿਰ ਜੰਮੇ ਬਸਪੁਰ ਦਾ ਜਰੂਰ ਬਣ ਗਏ ਪਤਾ ਹੀ ਹੈ ਲਿਖਿਆ ਤਾਂ ਜਾਣ ਪੁੱਛਿਆ ਪਰ ਫੇਰ ਕੋੜੇ ਉਹ ਕੋੜੇ ਫੇਰ ਮਰਦੇ ਜੰਮੇ ਇਹ ਕੋੜੇ ਤੋਂ ਕੀ ਭਾਬਾ ਜੀ ਦੇਖੋ ਕੋੜੀ ਹੈ ਗੋੜ ਭਾ ਮਰੂ ਸਾਡੇ ਅੰਦਰ ਜ਼ੋਤ ਹੈ ਜੋ ਜੋਤ ਨੂੰ ਕੋਲ ਕਰਨਾ ਪਰੂਣਾ ਗਿਆਨਤਾ ਦਾ ਹੋੜ ਹੈ ਕਿੰਨੀ ਅਗਿਆਨਤਾ ਹਿਰਦੇ ਚੋਂ ਨਹੀਂ ਕੋਲ ਉਹ ਇੱਥੇ ਨੂੰ ਕਿਹਾ ਕੋਲ ਦੱਸ ਗਿਆ ਉਹਦਾ ਕੋਲ ਹੋ ਗਿਆਰ ਹਟ ਗਿਆ ਰਾਜੇ ਦਾ ਕੋਲ ਹੋ ਕੀ ਹੁੰਦਾ ਕੋਲ ਵਿਆਖਰੀ ਦੁਨੀਆ ਅਗਿਆਨਤਾ ਹੀ ਕੋਲ ਹੈ ਹਾਂਜੀ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁਖ ਕੋਲੇ ਮਨ ਖੋਟੇ ਦਹੀਂ ਵਿਛੋੜੀ ਉਹ ਬਾਰੇ ਮੱਛਾ ਬੋਲਦੇ ਉੂਦੇ ਬੜੇ ਮੱਖੇ ਹੁੰਦੇ ਨੇ ਵਾਹ ਪਰ ਕਾਉਦੇ ਬੜਾ ਮਿੱਠਾ ਬੋਲਦੇ ਨੇ ਪੰਡਤ ਇਹ ਮੁੱਖ ਮਿੱਠੇ ਪੰਡਤ ਬੜੇ ਮੁੱਖੋਂ ਮਿੱਠਾ ਬੋਲਦੇ ਨੇ ਪਰ ਅੰਦਰ ਕੀ ਹੁੰਦਾ ਉਦੋਂ ਜ਼ਹਿਰ ਘੋਲਦੇ ਨੇ ਗੁਰਮਤਿ ਦੇ ਖਿਲਾਫ ਗੁਰਮਤਿ ਦੇ ਸੱਚ ਦੇ ਖਿਲਾਫ ਜੋ ਬੋਲਦੇ ਨੇ ਗੁਰਮਤਿ ਦੇ ਖਿਲਾਫ ਹੀ ਬੋਲਦੇ ਨੇ ਐਸ ਤਰੀਕੇ ਨਾਲ ਬੋਲਦੇ ਨੇ ਕਿ ਆਦਮੀ ਨੂੰ ਕਰਦੇ ਹੀ ਰਹੇ ਦੇ ਉੱਤੇ ਦੇ ਲੱਕ ਬਣ ਗਏ ਐ ਫਰੀਦ ਅਰ ਪੀੜੀ ਗੁਰਮਤਿ ਨੂੰ ਲਾਉਂਦੇ ਰਹੇ ਨੇ ਇਹ ਪੰਕਤੀਓਂ ਦਾ ਬਸ ਸ੍ਰੀ ਚੰਦ ਕਵੀ ਉਹਨਾਂ ਦੇ ਪਿੱਛੇ ਸੀ ਜਿਹੜੇ ਧਰਮ ਸਾਡੇ ਗਏ ਸੀ ਇਹ ਉਹ ਜਿਹੇ ਗੁਰੂ ਸਾਹਿਬ ਦੇ ਪੈਰਲ ਜਿਹੜੇ ਧਰਮ ਦੇ ਖਾ ਬੋਲ ਰਹੇ ਨੇ ਜਿਹੜੇ ਪੈਰਲ ਬੋਲ ਰਹੇ ਨੇ ਨਾ ਕਿਵੇਂ ਬੇਰਵਾਹ ਬੋਲ ਰਹੇ ਚੌਥੇ ਪਾਸ਼ਾ ਦੇ ਇਹ ਵੱਲ ਇਸ਼ਾਰਾ ਉਹ ਉਹਦੇ ਬੜੇ ਮੱਠੇ ਸੀ ਪਰ ਅੰਦਰੋਂ ਬਿਸਕਰਦੇ ਨੇ ਬਾਇਆ ਦੀ ਗੱਲ ਕਰਦੇ ਨੇ ਗੁਰੂ ਕਰਦੀ ਦੰਧਿਆ ਕਰਦੇ ਨੇ ਜਸ ਯਾਰ ਕੋਲ ਕਰਦੇ ਖਾਸ ਮੁਖ ਭੋਲੇ ਹੰ ਮਨ ਖੋਤੇ ਦਈ ਵਿਛੋੜੇ ਮਨ ਖੋਤੇ ਨੇ ਪਰ ਵਿੱਚਰ ਟੁੱਟੇ ਹੋਏ ਹੁਕਮਤਾਂ ਉਹ ਵਿਛੜੇ ਹੋਏ ਨੇ ਕੋਈ ਬੰਦੇ ਨਹੀਂ ਉਹ ਆਪਣੇ ਭਾਂਵੇਂ ਚੱਲਦੇ ਨੇ ਪੁਰਕੇ ਪੜ੍ਹਦੀ ਚੱਲਦੇ ਠੀਕ ਹੈ